ਉਫੇ ਕਹਿੰਦੇ ਤਿਤਕੇ ਆ ਹோம் ਜਗ ਸਤ ਪੂਜਾ ਪਈਏ ਕਾਰੀ ਸੋਹੇ ਸ਼ੁਭ ਕਾਰਜਾਂ ਵਾਸਤੇ ਦੂਸਰੇ ਲੋਕਾਂ ਦੀ ਨਹੀਂ ਜਿਹੜੇ ਲੋਕ ਨਾਸਤਕ ਹਨ ਉਹਨਾਂ ਦਾ ਕੰਮ ਕੀ ਹੈ ਉਹਨਾਂ ਨੇ ਗੱਲ ਇੱਕ ਪਾਸਿਓਂ ਐਸੀ ਗਲਤ ਕਹਿਣੀ ਸਤਗੁਰੂ ਪ੍ਰਤਾਪ ਸਿੰਘ ਨੇ ਤਾਂ ਕੀਤਾ ਹਵਨ 100 20 ਪੀਪਿਆਂ ਦਾ ਸਨ 1937 ਚ 37 ਚ ਤੇ ਜਿਹੜੇ ਨਾਸਤਕ ਸੀ ਕਹਿੰਦੇ ਜੇ ਹਵਾ ਸ਼ੁੱਧ ਕਰਨੀ ਤਾਂ ਫਰੰਟੀਅਰ ਮੇਲ ਦੇ ਬੰਬੇ ਚ ਕਹਿੰਦੇ ਪਾ ਦਿਓ ਪਸ਼ੋਰ ਤੋਂ ਲੈ ਕੇ ਉਹ ਨਾ ਕੀ ਬੰਬੇ ਤੱਕ ਜਾਏਗੀ ਸਾਰੇ ਹਿੰਦੁਸਤਾਨ ਦੀ ਹਵਾ ਸ਼ੁੱਧ ਹੋ ਜਾਏਗੀ ਜੇ ਨਾ ਮਖੌਲ ਕਰਨੇ ਪਰ ਹੋਮ ਮੇਰਾ ਇਹ ਪਰਕਰਨ ਨਹੀਂ ਹੈ ਫਿਰ ਇਹ ਦੇਵ ਦੂਸਰਾ ਗੁਰੂ ਰੇਣ ਜਿਸ ਤਰ੍ਹਾਂ ਸਾਨੂੰ ਸਤਗੁਰੂ ਦੀ ਪ੍ਰਾਪਤੀ ਹੋਈ ਹੈ ਸੰਤਾ ਸਤਵਜਨ ਸੋਣਾ ਨੇ ਕਿਹਾ ਭਜਨ ਕਰਨ ਦੀ ਪ੍ਰਾਪਤੀ ਹੋਈ ਹੈ ਮੈਂ ਮਾਨ ਨਹੀਂ ਕਰਦਾ ਮੈਂ ਸਵਾਦ ਦੇਖਿਆ ਜ਼ਰੂਰ मैं ਉਹਨਾਂ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ ਆ ਜਿਹੜੇ ਕਿ ਭਜਨ ਕਰਦੇ ਜਿਹਨੂੰ ਅੱਠ ਪੈਰ ਬੀਤ ਸਕਦੇ ਸੀ ਜਿਹੜੇ ਇਹ ਕਹਿ ਸਕਦੇ ਫੇ ਕਾਕਾ ਇੱਥੇ ਤੁਰਿਆ ਫਿਰਦਾ ਗਿਆ ਨਹੀਂ ਉਹ ਕਹਿੰਦਾ ਮਾਮਾ ਜੀ ਉਹ ਕੱਲ ਦੀ ਗੱਲ ਸੀ ਜਿਹਨੂੰ 24 ਘੰਟੇ ਪਤਾ ਹੀ ਨਹੀਂ ਲੱਗਾ ਭਜਨ ਕਰਦੇ ਨੂੰ ਉਹ ਸਾਡੇ ਵਿੱਚ ਪਾਵਰ ਨਾਮ ਧਾਰੀਆਂ ਚ ਸੀ ਉਹ ਅਸੀਂ ਕੋਸ਼ਿਸ਼ ਖੁਦ ਕਰਨੀ ਇਹ ਕਿਸੇ ਤਰ੍ਹਾਂ ਮਨ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਏ ਮੈਂ ਕਿ ਲੜਾਈ ਕਰਨੀ ਪੈਗੀ ਬਗਾਵਤ ਕਰਨੀ ਪੈਗੀ ਬਾਣੀ ਚ ਲਿਖ ਦਿੱਤਾ ਕਹਿੰਦੇ ਕੂਟਨ ਸੋਏ ਜੋ ਮਨ ਕੋ ਕੂਟੇ ਮਨ ਕੂਟੇ ਤਾਂ ਦਮ ਜਮ ਤੇ ਛੂਟੇ ਇੱਕ ਵਾਰ ਇਹਨੇ ਫਿਰ ਕਹਿੰਦੇ ਕੋਟ ਕੋਟ ਮਨ ਕਸਵਟੀ ਸੰਤਾ ਸੁਰਜੀਤ ਸਿੰਘ ਸਾਹਮਣੇ ਬੈਠੇ ਆ ਇਹ ਨਾ ਕੀਗਾ ਰਾਗ ਵਿਦਿਆ ਸਿਖਾਉਂਦੇ ਐ ਜਿਹੜਾ ਬੱਚਾ ਨਹੀਂ ਫਿਰ ਸੰਥਾ ਯਾਦ ਕਰਦਾ ਉਸ ਦੇ ਚਪੇੜ ਵੀ ਮਾਰਨੀ ਪੈਂਦੀ ਹੈ ਘੂਰਨਾ ਪੈਂਦਾ ਉਸ ਨੂੰ ਖੜਾ ਕਰ ਦਿੱਤਾ ਜਾਂਦਾ ਹੈ ਇਹ ਉਹਦੀ ਡਿਊਟੀ ਹੈ ਉਸਤਾਦ ਦੀ ਸਾਡਾ ਵੀ ਸਤਿਗੁਰੂ ਹੈ ਔਰ ਸਾਡਾ ਇਹ ਮਨ ਇਹਨੂੰ ਬਾਲਕ ਦੀ ਨਿਆਈ ਕਿਹਾ ਇਹਦੇ ਨਾਲ ਤੁਹਾਨੂੰ ਉਹ ਮੈਂ ਕੱਲ ਗੱਲ ਕੀਤੀ ਮੈਂ ਕਿਹਾ ਸੌਖਾ ਹੀ ਤਰੀਕਾ ਹੈ ਭਈ ਜੋ ਮਨ ਕਹਿੰਦਾ ਨਾ ਉਹ ਨਾ ਕਰੋ ਬਸ ਪਹਿਲੀ ਸਟੇਜ ਪਹਿਲਾ ਸਬਕ ਮਨ ਨੂੰ ਇਹ ਆ ਭਈ ਮਨ ਜਿਹੜੀ ਚੀਜ਼ ਚਾਹੁੰਦਾ ਉਹ ਇਹਨੂੰ ਨਾਂ ਦੇਵੋ ਇਹਨਾਂ ਡਿੱਕਾ ਪਾਓ। ਸਵਾਮੀ ਰਾਮ ਤੀਰਸ ਜੀ ਬੈਠੇ ਰੋਟੀ ਖਾ ਰਹੇ ਹਨ ਤੇ ਮਾਨ ਨੇ ਕਿਹਾ ਪਈ ਜੇ ਇੱਕ ਨਿੰਬੂ ਹੁੰਦਾ ਨਾ ਤੇ ਸਵਾਦ ਆ ਜਾਣਾ ਸੀ ਰੋਟੀ ਦਾ। ਤੇ ਉਹ ਕਹਿੰਦੇ ਵੀ ਚਲੋ ਕੱਲ ਨੂੰ ਸਹੀ ਇੰਨਾ ਝਗੜਾ ਝਗੜਾ ਹੋਇਆ ਬਿਵੇਕ ਔਰ ਅਬਿਵੇਕ ਦਾ। ਅਖੀਰ ਅਬਿਵੇਕ ਜਿਹੜਾ ਸੀ ਉਹ ਤਕੜਾ ਹੋ ਗਿਆ ਕਹਿੰਦਾ ਬਾਹਰ ਰੀੜੀ ਤਾਂ ਬਾਹਰ ਖੜੀ ਹੋ ਹੋਕਾ ਵੀ ਦਿੰਦਾ ਸਬਜੀ ਦਾ ਵੀ ਦੋ ਪੈਸਿਆਂ ਦਾ ਨਿੰਬੂ ਹੁਣ। ਉੱਠ ਕੇ ਜਾ ਕੇ ਨਿੰਬੂ ਲਾਇਆ ਰੋਟੀ ਲਾ ਕੇ ਆ ਕੇ ਚੀਰ ਲਿਆ ਰੱਖ ਲਿਆ। ਫਿਰ ਝਗੜਾ ਹੋਇਆ। ਉਹ ਕਹਿੰਦਾ ਉਹ ਮੂਰਖਾ मना ਅੱਜ तू ਮੈਨੂੰ ਇਹ ਨਿੰਬੂ ਬਦਲੇ ਰੋਟੀ ਖਾਂਦੇ ਖਾਂਦੇ ਨੂੰ ਉਠਾਲਿਆ ਤੇ ਕੱਲ ਨੂੰ ਮੈਨੂੰ ਕੁਝ ਹੋਰ ਇਲਤ ਕਰੇਗਾ ਨਿੰਬੂ ਚੱਕ ਕੇ ਬਾਅਦ ਮਾਰ। ਅਸ਼্নান ਕਰਨ ਗਏ ਹਨ ਸੰਤ ਰਾਤ ਸਾਰੀ ਭਜਨ ਕਰਦੇ ਰਹੇ ਹਨ। ਠਕਾ ਬਗਦਾ ਹੈ بارش ਪੈਂਦੀ ਥੋੜੀ ਥੋੜੀ ਤੇ ਕਹਿੰਦੇ ਵੀ ਮੈਂ ਕਿਹੜਾ ਗ੍ਰਸਤੀ ਆ ਕੋਈ ਗਲਤ ਕੰਮ ਕੀਤਾ ਵੀ ਅੱਜ ਨਾ ਇਸ਼ਨਾਨ ਕੀਤਾ ਤਾਂ होया ਝਗੜਾ ਬਵੇਕ और ਅਬਵੇਕ ਦਾ बैठे ਹਨ बस ਫੇ ਉਧਰ ला जोर ਪਿਆ ਕੇ कोई ਨਹੀਂ बचू ਅੱਜ ਤੂੰ ਮੈਨੂੰ ਇਹ ਇਸ਼ਾਨਾਨ ਕਰ ਤੋ ਰੋਕਦਾ ਤੇ ਲੈ ਹੁਣ ਫੇ ਸਣੇ ਗੋਦੜੀ ਵਿੱਚ ਛਾਲ ਮਾਰੀ ਕਹਿੰਦੇ ਫੋਣੇ ਉੱਤੇ ਹੀ ਸੁਕੂ ਪਾਵਾਂ ਤਿੰਨ ਦਿਨ ਲੱਗਣ ਪਾਵਾਂ ਚਾਰ ਦਿਨ ਲੱਗਣ ਇਹਦੇ ਨਾਲ ਝਗੜਾ ਕਰਨਾ ਪੈਗਾ ਮਨ ਹੀ ਨਾਲ ਝਗੜਾ ਮਨ ਹੀ ਇਹ ਗੁਰਬਾਣੀ ਦੇ ਵਿੱਚੋਂ ਮਰੋੜੀਆਂ ਲੱਭਣਗੀਆਂ ਸਤਿਗੁਰਾਂ ਨੇ ਸਭ ਕੁਝ ਕਿਰਪਾ ਕਰ ਦਿੱਤੀ ਸਤਿਗੁਰੂ ਜਗਜੀਤ ਸਿੰਘ ਨੇ ਹੁਕਮ ਦੇ ਦਿੱਤਾ ਜੇ ਤੁਸੀਂ ਸਾਰਾ ਪਰਿਵਾਰ ਬੈਠੋ ਪਾਠ ਕਰੋਗੇ ਉਹਦੇ ਕੋਈ ਪੰਗਤੀ ਆਏਗੀ ਕੋਈ ਉਹਦੇ ਸ਼ਬਦ ਆਏਗਾ ਉਹਦਾ ਵਿਚਾਰ ਕਰੋਗੇ ਭਈ ਕੀ ਇਹ ਕਹਿ ਰਹੀ ਬਾਣੀ ਸਾਨੂੰ ਕੀ ਕਹਿ ਰਹੀ ਤਾਂ ਅਸੀਂ ਕੀ ਕਰ ਰਹੇ ਮਨਮੁਖ ਤੇ ਗੁਰਮੁਖ ਮਨਮੁਖ ਜਿਹੜਾ ਉਹਦੇ ਵਾਸਤੇ ਬੜੀ ਸਜ਼ਾ ਲਿਖ ਦਿੱਤੀ ਕਹਿੰਦੇ ਮਨਮੁਖ ਆਵੇ ਤੇ ਮਨਮੁਖ ਜਾਵੇ ਤਾਂ ਮਨਮੁਖ ਫਿਰ ਫਿਰ ਚੋਟਾਂ ਖਾਵੇ ਇੱਥੇ ਹੀ ਬੱਸ ਨਹੀਂ ਕਹਿੰਦੇ ਜਿਤਨੇ ਨਰਕ ਤੇ ਮਨਮੁਖ ਪੋਗੇ 84 ਨਰਕ ਲਿਖੇ ਗੁਰੂ ਨਾਨਕ ਗੁਰੂ पंचम पादशाह ने वेदांत ਦੇ ਵਿੱਚ 18 ਨਰਕ ਲਿਖੇ శ్రీ ਮਦ ਭਾਗ ਉਹ ਵੀ ਮੈਂ ਪੜੇ ਹਨ ਤੇ ਕਹਿੰਦੇ ਹਨ 84 ਨਰਕ ਸਾਖਤ ਪੋਗਾ ਇਹ ਜੈਸਾ ਕਰੇ ਜਿਤਨੇ ਨਰਕ ਸੇ ਮਨਮੁਖ ਪੋਗੇ ਜੇ ਅਸੀਂ ਮਨ ਦੀ ਮਰਜ਼ੀ ਕਰਦੇ ਹਾਂ ਅਸੀਂ ਸਿੱਧੇ ਕਪੜੇ ਪਾਏ ਹੋਏ ਸੋਦਾchnਾਨ ਕੀਤਾ ਆ ਮਾੜਾ ਫੜ ਕੇ ਬੈਠੇ ਹਾਂ ਫਿਰ ਅਸੀਂ ਮਨਮੁਖ ਬਣ ਜਾਂਦੇ ਜਦੋਂ ਸਾਨੂੰ ਮਨ ਕੁਝ ਕਹਿੰਦਾ ਉਹਦੇ ਆਖੇ ਲੱਗਦੇ ਉਸ ਵੇਲੇ ਉਹ ਫਲਾਨੀ ਨੂੰ ਸਸਰੀ ਘਰ ਨਹੀਂ ਬੁਲਾਉਣੀ ਇੱਥੋਂ ਹੀ ਮਨਮੁਖ ਬਣ ਜਾਏਗਾ ਫਲਾਨੇ ਨਾਲ ਗੱਲ ਨਹੀਂ ਕਰਨੀ ਫਲਾਨੇ ਨਾਲ ਅਸੀਂ ਇਸ ਤੇ ਮਨ ਦੇ ਮਗਰ ਗੁਰਮੁਖ ਕੀ ਹੈ ਹੋਏ ਸਗਲ ਕੀ ਰੇਣ ਕਸ ਤੋਂ ਆਏ ਹਮਾਰੇ ਪਾਸ ਇਹ ਲੜਾਈ ਹੁੰਦੀ ਹੈ ਅੰਦਰ ਉਹ ਉਹ ਅਸੀਂ ਉਸ ਨੂੰ ਜਿੱਤਣਾ ਹੈ ਅਸੀਂ ਕਲਯੁਗ ਦੀ ਜਿਹੜੀ ਸੈਨਾ ਹੈ ਉਹ ਐਨੀ ਇਸ ਵੇਲੇ ਚੜੀ ਹੈ ਸਤਗੁਰੂ ਰਾਮ ਸਿੰਘ ਨੂੰ ਤਾਂ ਕੀਤਾ ਜਲਾਵਤਨ ਅੰਗਰੇਜ਼ ਨੇ ਅਸੀਂ ਉਹਦੇ ਮੁਲਕ ਚ ਆਏ ਆ ਅਸੀਂ ਫਿਲਾਂ ਬੜੀਆਂ ਮਾਰਨੇ ਆਂ ਲੋ ਜੀ ਅਸੀਂ ਅੰਗਰੇਜ਼ਾਂ ਦੇ ਮੁਲਕ ਚ ਆ ਕੇ ਅਸੀਂ ਆਪਣਾ ਬਾਣਾ ਸਿੱਧਾ ਪਾਉਨੇ ਆ ਅਸੀਂ ਜੀ ਸੋਧਾਂ ਰੱਖਦੇ ਆ ਘਰ ਜਾ ਕੇ ਦੇਖੋ ਬੱਚੇ ਗਿੱਟਮਿਟ ਕਰਨਗੇ ਉਹਨਾਂ ਨੂੰ ਨਾ ਕਿ ਪੰਜਾਬੀ ਬੋਲਣੀ ਨਹੀਂ ਆਉਂਦੀ ਮਲੇਸ਼ ਪਾਸ਼ਾ ਉਹ ਮਲੇਸ਼ ਪਾਸ਼ਾ ਸਤਗੁਰੂ ਪ੍ਰਤਾਪ ਸਿੰਘ ਜੀ ਨੇ ਇੱਕ ਵਾਰੀ ਇਸ ਤਰ੍ਹਾਂ ਐਲਾਨ ਕਰਤਾ ਸੀ ਕਿ ਬਗੈਰ ਗੁਰਮੁਖੀ ਦੇ ਲਿਖੀ ਹੋਈ ਚਿੱਠੀ ਤੋਂ ਜਵਾਬ ਨਹੀਂ ਦਿੱਤਾ ਜਾਏਗਾ ਮੇਰਾ ਮਤਲਬ ਇਸ ਤਰ੍ਹਾਂ ਬੱਚਿਆਂ ਤੇ ਮੈਂ ਇਸ ਪ੍ਰਕਰਨ ਨੂੰ ਲੰਬਾ ਨਹੀਂ ਖਿੱਚਦਾ ਇਹ ਬੀਬੀਆਂ ਦੀ ਡਿਊਟੀ ਹੈ ਜਿਹੜੀਆਂ ਤੁਹਾਡੇ ਚੋਂ ਸਿਆਣੀਆਂ ਆ ਉਹ ਇਸ ਗੱਲ ਦਾ ਤਹਈਆ ਅੱਜ ਤੋਂ ਕਰਨ ਕਿ ਅਸੀਂ ਇੱਕ ਇੱਕ ਵਰਡ ਮੈਂ ਵੀ ਹੁਣ ਵਰਡ ਹੀ ਕਹਿਣਾ ਸ਼ਬਦ ਇੱਕ ਇੱਕ ਗੱਲ ਨਾ ਮੈਂ ਮੈਂ ਤਾਂ ਮੈਂ ਚੋਕਚਾ ਕੇ ਨਾ ਕੀਆ ਕਿ ਮੈਂ ਕੋਈ ਅੰਗਰੇਜ਼ੀ ਪੜਿਆ ਨਹੀਂ ਚਾਰ ਜਮਾਤਾਂ ਸਿਰਫ ਮੈਂ ਉਰਦੂ ਦੀਆਂ ਪੜਿਆ ਤਾਂ ਸਤਗੁਰੂ ਪ੍ਰਤਾਪ ਸਿੰਘ ਆਰ ਸਤਗੁਰੂ ਜਗਜੀਤ ਸਿੰਘ ਨੇ ਮੇਰੇ ਤੇ ਕੀਤੀ ਮਿਹਨਤ ਮੈਨੂੰ ਜਿਸ ਤਰ੍ਹਾਂ ਉਹ ਨਾ ਕਿਹਾ ਜਿੱਥੇ ਸਿਹਾਰੀ ਲੱਗੀ ਹੁੰਦੀ ਨਾ ਉੱਥੇ ਵੀ ਸਾਡੇ ਬੰਦੇ ਜੇ ਫਿਰ ਏ ਲਾਉਂਦੇ ਕੱਲ ਭੋਗ ਪਾਉਂਦੇ ਸੀ ਮੈਂ ਉਹ ਦੇਖਦਾ ਸਾਂ ਵੀ ਉਹ ਜਿੱਥੇ ਸਿਹਾਰੀ ਆ ਨਾ ਉਹ ਕਹਿੰਦੇ ਹਨ ਕਿ ਬਲ ਹੋਆ ਬੰਧਨ ਛੁਟੇ ਕਸ਼ੂ ਨਾ ਹੋਤ ਉਪਾਇ ਕਸ਼ੂ ਨਾ ਹੋਤ ਉਪਾਇ ਇਹਦੇ ਚ ਫਰਕ ਹੈ ਇਹ ਸਤਗੁਰੂ ਜਗਜੀਤ ਸਿੰਘ ਦੀ ਹਜ਼ੂਰੀ ਦੇ ਵਿੱਚ ਮਨਜੂਰ ਨਹੀਂ ਹੈ ਬਲ ਹੋਆ ਬੰਧਨ ਛੁਟੇ ਕਸ਼ੂ ਨਾ ਹੋਤ ਉਪਾਇ ਗਲਤ ਹੋ ਗਿਆ ਵਲ ਹੋਆ ਬੰਦਨ ਛੁਟੇ ਕਸ਼ੂ ਨਾ ਹੋ ਤੋ ਉਪਾਇ ਇਸੇ ਮੇਰਾ ਮਤਲਬ ਇਸ ਤਰ੍ਹਾਂ ਅਸੀਂ ਇਹਨਾਂ ਸ਼ਬਦਾਂ ਨੂੰ ਬੱਚਿਆਂ ਨੂੰ ਅਸੀਂ ਇੱਕ ਇੱਕ ਸਿਖਾਉਣ ਲੱਗਾਂਗੇ ਤੇ ਸਾਲ ਬਾਅਦ ਜਦ ਤੁਸੀਂ ਇਹ ਮਨਾਓਗੇ ਤੇ ਤੁਹਾਨੂੰ ਇਹ ਸਵਾਦ ਆਏਗਾ ਮੈਂ ਇੱਕ ਲੋਥੇ ਫੈਮਲੀਆਂ ਦੇਖੀਆਂ ਨਰੋਬੀ ਉਹ ਕਹਿੰਦੇ ਜੀ ਸਾਡੇ ਘਰ ਦੇ ਵਿੱਚ ਅਸੀਂ ਇਹ ਕਾਨੂੰਨ ਬਣਾਤਾ ਭਈ ਜਿਹੜਾ ਬੱਚਾ ਇੰਗਲਿਸ਼ ਦੇ ਵਿੱਚ ਕੋਈ ਚੀਜ਼ ਮੰਗੇ ਉਹਨੂੰ ਦੇਵੋ ਨਾ ਪੰਜਾਬੀ ਚ ਮੰਗੇ ਤਾਂ ਦਿਓ ਨਹੀਂ ਤਾਂ ਨਾ ਦਿਓ ਭੁੱਖਾ ਬੈਠਾ ਰਿਹਾ ਬਿਸ਼ੱਕ ਥੋੜੀ ਬਗਾਵਤ ਕਰਨੀ ਪੈਗੀ ਇਹ ਮਨ ਮਨ ਜਿਹੜਾ ਇਸ ਦੇ ਨਾਲ ਤੁਹਾਨੂੰ ਇਹ ਵੀ ਬਾਲਕ ਹੈ ਕਾਇਆ ਨਗਰੀ ਇਕ ਬਾਲਕ ਬਸਿਆ ਲਿਖਿਆ ਬਸੰਤ ਰਾਗ ਕਾਇਆ ਨਗਰੀ ਇਕ ਬਾਲਕ ਬਸਿਆ ਖਿਨਪਾਲ ਠੇਰ ਨਾ ਰਹੀ ਕਹਿੰਦੇ ਅਨਕ ਉਪਾਅ ਯਤਨ ਕਰ ਥਾਕੇ ਬਾਰਨ ਬਾਰ ਪਰਮਾਈ ਤਫੀਕੀ ਕਹਿੰਦੇ ਸੱਚੇ ਮੇਰੇ ਠਾਕੁਰ ਹੇ ਸਤਿਗੁਰੂ ਪ੍ਰਤਾਪ ਸਿੰਘ ਹੇ ਸਤਿਗੁਰੂ ਜਗਜੀਤ ਸਿੰਘ ਜੀ ਮੇਰੇ ਠਾਕਰ ਬਾਲਕ ਇਕਤ ਘਰ ਆਣ ਮੇਰੇ ਨਾਲ ਮਦਦ ਕਰੋ ਇੱਕ ਬਾਹਰ ਕੋ ਸੰਗਤ ਚ ਪੈ ਕੇ ਮੁੰਡਾ ਇਥੇ ਮੁੰਡੇ ਵਿਗੜੇ ਹੋਏ ਲੋ ਜੀ ਉਹ ਕਹਿੰਦੇ ਕੋ ਸਿਰ ਮੋਣਾ ਲੈਂਦਾ ਕੋ ਕੋਈ ਕੋ ਖਾਣ ਪੀਣ ਲਾ ਸਾਡੇ ਜੀ ਕਾਬੂ ਨਹੀਂ ਆਉਂਦਾ ਅਸੀਂ ਫਿਰ ਤੜਲੇ ਲੈਨੇ ਆ ਇਸ ਤੇ ਮਨ ਵੀ ਇਹ ਸਾਡਾ ਇਹ ਕੁਛ ਕਰਦਾ ਅਸੀਂ ਇਹ ਬੀਬੀਆਂ ਨੇ ਇਹ ਫਾਊਂਡੇਸ਼ਨ ਹੈ ਅਸੀਂ ਮਕਾਨ ਬਣਾਉਨੇ ਸਾਰੇ ਕਰੀਬਨ ਕ੍ਰਿਮ ਰਾਮ ਗੜੀਏ ਅਸੀਂ ਜਿਸ ਵੇਲੇ ਲੇਆਉਟ ਕਰਦੇ ਆ ਉਸ ਵੇਲੇ ਉਹ ਜਿਹੜੀ ਫਾਊਂਡੇਸ਼ਨ ਹੁੰਦੀ ਹੈ ਉਹ ਫਾਊਂਡੇਸ਼ਨ ਬਿਲਕੁਲ ਸਹੀ ਉਹਨੂੰ ਆ ਕੇ ਪਹਿਲੇ ਇੰਜੀਨੀਅਰ ਚੈੱਕ ਕਰਦੇ ਹਨ ਪਾਸ ਕਰਦੇ ਹਨ ਜੇ ਉਹ ਖਰਾਬ ਹੋਏਗਾ ਫਾਊਂਡੇਸ਼ਨ ਤਾਂ ਫਿਰ ਇਮਾਰਤ ਉੱਤੇ ਆਪੇ ਗਲਤ ਬਣੇਗੀ ਇਹ ਫਾਊਂਡੇਸ਼ਨ ਬੀਬੀਓ ਮਾਇਓ ਤੁਸੀਂ ਰੱਖਣਾ ਹੈ ਤੁਸੀਂ ਮਾਤਾ ਦਾ ਬੱਚੇ ਦੇ ਵਿੱਚ ਬਹੁਤਾ ਯੋਗਦਾਨ ਹੈ माता ਦੇ पेट ਦੇ माता ਮਾਤਾ ਦੀ ਰਕਤ ਦੇ ਨਾਲ ਬੱਚਾ ਪਲਦਾ ਹੈ ਮਾਤਾ ਹੀ ਫੇਰ ਉਸ ਨੂੰ ਦੁੱਧ ਚਗਾਉਂਦੀ ਭਾਵਾਂ ਅੱਜ ਕੱਲ ਦੀ ਮਾਤਾ ਨਹੀਂ ਚਗਾਉਂਦੀ ਉਹ ਕਾਰਨ ਹੁਣ ਕੀ ਕਹਿੰਦੇ ਜੀ ਬੱਚੇ ਆਖ ਨਹੀਂ ਲੱਗਦਾ ਬੱਚੇ ਆਖੇ ਕੀ ਲਾ ਬੋਤਲ ਦਾ ਦੁੱਧ ਉਹਨਾਂ ਨੇ ਪੀਤਾ ਹੈ ਉਹ ਪਰਾ ਮਾਂ ਦਾ ਤਾਂ ਦੁੱਧ ਉੱਥੇ ਪਿੱਛੇ ਕਹਿ ਦੇਣਾ ਜੇ ਕਹਿਣਾ ਜੇ ਮਾਂ ਦਾ ਦੁੱਧ ਪੀਤਾ ਤਾਂ ਮੇਰੇ ਸਾਹਮਣੇ ਉਹ ਮਾਂ ਦਾ ਦੁੱਧ ਤਾਂ ਪੀਤਾ ਫੈਮਿਲੀ ਨਾਲ ਕਿਦਾਂ ਉਹ ਬਿਸਮਿਲ੍ਲਾ ਹੀ ਗੱਲ ਤਾਂ ਪਹਿਲੇ ਉਹ ਆ ਗੁਰਦੇਵ ਆਪਣਾ ਇਥੇ ਤੁਸੀਂ ਦੇਖੋਗੇ ਇਹ ਤਿੰਨ ਸਾਲ ਨਾ ਕਿ ਮਾਤਾ ਦਾ ਦੁੱਧ ਪੀਤਾ ਹੈ ਉਹ ਸਾਗੁਰੂਆਂ ਦਾ ਨਾ ਹਨੂਮਾਨ ਰੱਖਿਆ ਉਹ ਗੱਡੀ ਉਥੇ ਫਸੀ ਨਾ ਕਿ ਨਰੋਬੀ ਉਹ ਸਾਰੇ ਲੱਗੇ ਟਿੱਡੀਆਂ ਵਾਂਗੂ ਉਹ ਗੱਡੀ ਨਿਕਲੀ ਸਾਗੁਰੂ ਜੀ ਪਰੇ ਦੇਖਣ ਤਮਾਸ਼ਾ ਦੇਖਣ ਸਾਗੁਰੂ ਜਗਜੀਤ ਸਿੰਘ ਜੀ ਉਹ ਗੁਰਦੇਵ ਨੇ ਜਾ ਕੇ ਧੱਕਾ ਮਾਰਿਆ ਉਹ ਨਾ ਹੀ ਉਹਦਾ ਨਾ ਹਨੂਮਾਨ ਕਹਿੰਦੇ ਸਾਡਾ ਹਨੂਮਾਨ ਤੋ ਉਹ ਮੈਂ ਸਾਗੁਰਾ ਨੂੰ ਉਲਾਮਾ ਦਿੱਤਾ ਮੈਂ ਕਿਹਾ ਸੱਚੇ ਪਾਤਸ਼ਾਹ ਤੁਸੀਂ ਇਹਦਾ ਵਿਆਹ ਨਾ ਹੋਵੇ ਮੈਂ ਕਿਹਾ ਤੁਸੀਂ ਇਹਦਾ ਨਾਂ ਹਨੂਮਾਨ ਦਾ ਤਾਂ ਹਨੂਮਾਨ ਦਾ ਤਾਂ ਵਿਆਹ ਨਹੀਂ ਜਿਹਾ ਤੇ ਕਹਿੰਦੇ ਵੀ ਤੂੰ ਇਹ ਸਾਹਿਬ ਭੇਜੋ ਅਸੀਂ ਹਨੂਮਾਨ ਦਾ ਅੱਛਾ ਭੇਜ ਦਿੱਤਾ ਉੱਥੇ ਮੇਰੇ ਕੋਲ ਵੀਡੀਓ ਕੈਸਿਟ ਆ ਅਰਦਾਸਾ ਹੋਣ ਤੋਂ ਬਾਅਦ ਸੰਗਤ ਖੜੀ ਉਦਾਂ ਹੀ ਤੇ ਸਤਿਗੁਰੂ ਜੀ ਵੀ ਖੜੇ ਆ ਤੇ ਇਹਨਾਂ ਨੂੰ ਇਸ਼ਾਰਾ ਕਰਕੇ ਲਾਗੇ ਸੱਦਿਆ ਦੋਹਾਂ ਨੂੰ ਜੋੜੀ ਨੂੰ